ਚਲੋਕ ਮਹਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ ਹਲਤ ਪਲਤ ਦੋਵੇਂ ਗਏ ਦਰਗਾ ਨਾਹੀ ਠਾਉ ਜਿਦੋਂ ਨੇ ਆਪਣਾ ਗੁਰ ਗੋਪਲਿਆ ਆਪਣੇ ਅੰਦਰ ਆਤਮਾ ਦੀ ਆਵਾਜ਼ ਨੂੰ ਦਬਾ ਲਿਆ ਅੰਦਰੋਂ ਤਾਂ ਕੁਛ ਹੋਰ ਆਈ ਹੈ ਬਾਹਰ ਕੋ ਠੋਰ ਬੋਲਦਾ ਉੱਤਰਾ ਤੋਂ ਦੇ ਆਵਾਜ਼ ਦਬਾ ਕੇ ਗੱਲ ਕਰਦੇ ਨੇ। ਹੂੰ। ਅੰਦਰੋਂ ਤਾਂ ਗੁਰਬਾਣੀ ਨੂੰ ਬੋਲਦੇ। ਬਾਹਰੋਂ ਨਹੀਂ ਬੋਲਦੇ। ਹਾਂਜੀ। ਅੰਦਰੋਂ ਤਾਂ ਮੰਨਦੇ ਨੇ ਗੱਲ ਸੱਚੀ ਐ। ਬਾਹਰੋਂ ਨਹੀਂ ਮੰਨਦੇ। ਉਹ ਆਪਣਾ ਗੁਰ ਗੋਪਿਆ ਉਹਨਾਂ ਨੇ ਗੁਪਤ ਕਰ ਲਿਆ। ਜਿਸ ਗੁਰ ਜਿੰਨ ਗੁਰੂ ਉਹ ਨਰ ਜਿਹਨੇ ਠੌਰ ਨਾ ਠਾਉ। ਤੇਸ ਠੌਰ ਨਾ ਠਾਉ। ਉਹਨਾਂ ਨੂੰ ਨਾ ਉੱਥੇ। ਉਹਨਾਂ ਬਾਅਦ ਦਾ ਕੋਈ ਜਗ੍ਹਾ ਹੀ ਨਹੀਂ। ਲੋਕ-ਪਲੋਕ ਜਨੂ ਵਾਸਤੇ ਕੋਈ ਜਗ੍ਹਾ ਨਹੀਂ। ਬਹੁਤ ਕੜੀ ਸਜਾ ਨੂੰ ਵਾਸਤੇ। हलत पलत दो में गए दरगा नहीं था आलोक भी गया हालत है जड़ा अगर लोग पलट है जड़ा हो गया दरगाह की कोई जगह नहीं सब कुछ गवा ले उन्होंने सब कुछ गवा लिया जो जानबूझ के धर्मांतरण उल्टा प्रचार करते सब कुछ गवा लिया ओ वेला हाथ ना आवेई फिर सतगुरु लगै पाए सतगुरु की गणत है खुशी दुख है दुख विहाय ओ वेला कदी ओड़े जड़े वेळे ओने गलती कर गल दी, जड़े वेळे गलती कर गल दी ना गुरु गोपले अपना विरोध कर लिया गुरु के ओ वेला फेर दी हाथों निकल गया तब जान भी ऐसी गलती वेड़ा तक लियो बेडा वेड़ा आथन आवे फिर सतगुरु लग गए पाए फिर दोबारा सतोलते पाए पावे पड़ल लग जाके सत्य गलती होगी पर वो गलती होगी वो हो होगी तो वो फिर के नहीं है सतगुरु की गणते कुसीए दुख में है दुख ब्याह ਉਹਦੇ ਸਾਥ ਦੀ ਸੰਗਤ ਦੇ ਵਿੱਚ ਉਸ ਕੇ ਬੈਠ ਜਈਏ ਉੱਥੇ ਵੀ ਦੁੱਖ ਲੱਗਣੇ ਨੇ ਕੋਤਲ ਸੱਚ ਸੁਣਨਾ ਪੈਣਾ ਤੂੰ ਸਾਕੇ ਸੁਣਾਇਆ ਨਹੀਂ ਤੂੰ ਸਾ ਜਿਹੜਾ ਵਿਰੋਧ ਕੀਤਾ ਤਾਂ ਗੱਲ ਤੇ ਪੈ ਗਈ ਉਹ ਦੁੱਖ ਲੱਗਣੇ ਸੁਣਾਉਂਗਾ ਚੁਪੜੇ ਨੇ ਆਹਲ ਦਾ ਵਿਰੋਧ ਕਰਦਾ ਸੀ ਗੱਲ ਸਹੀ ਆਹੀ ਦੁਖੀ ਹੈ दुख लगो जी सतगुरु पुरख निरवैअर है आपे आप लए जिस लाए नानक दर्शन जिन्ना विखालियोन तेना दरगा लए छडाई सतगुरु दत पुरख निरवैअर ओदा बात विरोद नहीं जैसा नोआ उना दा सच दी गल कर दी है ਜੇ ਜਲਵਾਕ ਆਵੇ ਕੇ ਜਲਵਾਕ ਆਵੇ ਸਤਗੁਰੂ ਕੋਲ ਕਿੱਧਰ ਤੇ ਬੈਰ ਹੈ ਜੇ ਤੂੰ ਲੌਂਦਾ ਉਹ ਲੱਗ ਜਾਂਦਾ ਉਹ ਉੱਧਰ ਦਾ ਸਤਗੁਰ ਸਾਰਿਆਂ ਦੇ ਹੀ ਫਿਰ ਤਾਂ ਲੱਗ ਜਾਂਦਾ ਸਿੱਧੇ ਰਸਤੇ ਸਤਗੁਰ ਤੇ ਪਾਣੀ ਨਹੀਂ ਆਉਂਦਾ ਆਪਣੀ ਮਰਜ਼ੀ ਕਰਦਾ ਬਾਣ ਫਿਰ ਨਹੀਂ ਲੱਗਦਾ ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓਨ ਤਿੰਨਾਂ ਦਰਗਾ ਲਏ ਛੜਾ ਨਾਨਕ ਜੀ ਨਾਲ ਨੂੰ ਦਰਸ਼ਨ ਹੋ ਜਾਂਦਾ ਸਮਝ ਆ ਜਾਂਦੀ ਹੈ ਸੋਝੀ ਆ ਜਾਂਦੀ ਹੈ ਉਹ ਦਰਗਾਹ ਜੀ ਛੁੱਟ ਜਾਂਦੇ ਇਹਨਾਂ ਨੂੰ ਸੱਚ ਦਾ ਦਰਸ਼ਨ ਹੋ ਸੱਚ ਦਾ ਪਤਾ ਲੱਗ ਜਾਂਦਾ ਸਤਿ ਸ੍ਰੀ ਸਮਝ ਆ ਜਾਂਦੀ ਹੈ ਉਹ ਦਰਗਾਹ ਜੀ ਛੁੱਟ ਜਾਂਦੇ ਜਾ ਕੇ ਛਡਕਾਰਾ ਉਹਨਾਂ ਦਾ ਹੀ ਹੈ ਸਭ ਜਿਹਨੂੰ ਛਡਕਾਰਾ ਨਹੀਂ ਹੈ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਏ ਮਤ ਹਾਰੀ ਅਗੇ ਕਹਿੰਦੀ ਹੈ ਮਰ ਮੁਕਤਾ ਦਰਮਤ ਕੀਆ ਅਹਕਾਰੀਆ ਦਰਮਤਰ ਗਿਆਨ ਹੈਗਾ ਗਿਆਨ ਹੈਗਾ ਅਹਕਾਰ ਉਹ ਗੱਲ ਨਹੀਂ ਹੈ ਬਗਾਰ ੜੀਏ ਪਹਿਲੀ ਦਰਮਤਰ ਵੇਲੇ ਨਹੀਂ ਜਾਣਦੇ ਸੱਚ ਦੇ ਸੱਚ ਤੋਂ ਦੂਰ ਰੱਖਣਾ ਦਰਮਤਰ ਗੁਰੂ ਸਾਹਿਬ ਦਾ ਗਿਆਨ ਉੜਦਾ ਪੇ ਗਿਆ ਨਾ ਝੂਠ ਵਾਲੇ ਪਾਸੇ ਤੂੰ ਖੱਟਣਾ ਸੱਚ ਵਾਲੇ ਪਾਸੇ ਜਾਣ ਦੀ ਦਰਉ ਤਨੀ ਇਹ ਹੱਥਾਰ ਕਾਰਾੜਾ ਪੱਲਾ ਭਾਲੀ ਰੰਦ ਦੇਣਾ ਤੂੰ ਕਾਰਾੜਾ ਪੱਲਾ ਫੌਜ ਹੱਥਾਰ ਦੀ ਕਟੜੀ ਗੜੀ ਆਪਣੀ ਫੌਜ ਤੇ ਰੱਖ ਲੈ ਅੰਤਰ ਗ੍ਰੋਧ ਜੂਵੇ ਨੂੰਏ ਹਾਰੀ ਉੱਧਰ ਗ੍ਰੋਧ ਹੈ ਆਪਣੀ ਵਤ ਜੂਏ ਚ ਹਾਰ ਲਈ ਇਹ ਜੂਆ ਖੇਡਣਾ ਯਾ ਇਹ ਮਨਮੁਖ ਉਲਵਖਤਾ ਦਾ ਪ੍ਰਚਾਰ ਕਰਨ ਅਗਿਆਨਤਾ ਦਾ ਪ੍ਰਚਾਰ ਕਰਨਾ ਦੁਰਵਤ ਦਾ ਧਾਰ ਨਹੀਂ ਹੋ ਕੇ ਰਹਿਣਾ ਦੁਰਵਤ ਦੀ ਪ੍ਰੋਣਤਾ ਕੁਸਤ ਉਹ ਪਾਪ ਕਮਾਵੇ ਕਿਆ ਉਹ ਸੁਣਾ ਹੈ ਚਾ ਆਖ ਸੁਣਾਵੇ ਕੋੜਾ ਤੋ ਸਤ ਹੈ ਸਾਚ ਨੂੰ ਵਿਗਾੜ ਕੇ ਦਸਨਾ ਕੋ ਸੱਤ ਬੜ ਜੁੱਦਾ ਹੈ। ਕੂੜ ਦਾ ਡਰੈ ਝੂਠ ਹੁੰਦਾ ਨਾ। ਹਾਂਜੀ। ਨੂੰ ਵਿਗਾੜ ਕੇ ਦਸਨਾ ਕੋ ਸੱਤ ਬਣਾ ਦੇਣ। ਐਸਾ ਪਾਪ ਉਹ ਕਰਦਾ ਹੈ। ਆਪ ਕਹੁੰਦਾ ਹੈ, "ਕਿਆ ਸੁਣਾਂ? ਕਿਆ ਕਿਆ ਸੁਣੂਗਾ? ਕਿਆ ਆਸ ਕੇ ਲੱਗੂਗਾ?" ਆ ਕੋਸ਼ਾ ਕਰਨ ਲੱਗਿਆ ਹੋਇਆ। ਅੰਨਾ ਬੋਲਾ ਹੋਏ ਉਜੜ ਪਾਏ ਮਨਮੁਖ ਅੰਦਾ ਆਵੇ ਜਾਏ ਨਾ ਬੋੜਾ ਸਭ ਕੁਝ ਆਪਣਾ ਖੋ ਕੇ ਉਜੜ ਪਉਂਦਾ ਆਪਣੇ ਪੱਲੇ ਤਾਂ ਰੱਖਿਆ ਨਹੀਂ ਕੁਝ ਆਪਣੂ ਦਾ ਸਭ ਕੁਝ ਲਿਆ ਲੋਕਾਂ ਨੂੰ ਉਜੜ ਪਾ ਰਿਹਾ ਹੈ ਪਾਏ ਮਨਮੁਖ ਅੰਦਾ ਆਵੇ ਜਾਏ ਮਨਮੁਖ ਆਵੇ ਜਾਏ ਔਰ ਜਿੰਦੜੇ ਜਿ ਰਹੂਗਾ ਆਪਣੇ ਨਾਲ ਕਹਿਰਨ ਦੇ ਆਪਣੀ ਗੱਲੇ ਕੱਟ ਦੁੱਦ ਇਹ ਵੀ ਹੈ ਬਿਨ ਸਤਗੁਰ ਪੇਟੇ ਥਾਂ ਇਹ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਈ ਬਿਨ ਸਤਗੁਰ ਪੇਟੇ ਥਾਂ ਇਹ ਨਾ ਤੇ ਪੇਟ ਤੇ ਬਿਲੋਂ ਦੇ ਧਿਆਨ ਤੇ ਬਿਲੋਂ ਸਤਗੁਰ ਮਿਲੇ ਤਾਂ ਬਿਲੋਂ ਥਾਂ ਵੀ ਮਿਲ ਸਕਦੀ ਕਿਤੇ ਜਗ੍ਹਾ ਦੀ ਬਿਨ ਸਤ ਦੇ ਕਾੜੋ ਦੀ ਬਿਨ ਸਤ ਦਾ ਦੀ ਗੱਲਾਂ ਕਰੂਗਾ ਸਤਗੁਰ ਦੇ ਪੇਟੇ ਮਿਲੂ ਬਿਨ ਸਤਗੁਰੇ ਭੇਟੇ ਥਾਂ ਦੇ ਪਾਏ ਮਾਨਕ ਪੂਰਬ ਲਿਖਿਆ ਕਮਾਈ ਉਹ ਪੂਰਬ ਲਿਖਿਆ ਸੀ ਜਿਹੜਾ ਬੰਦੇ ਅਸੀ ਉਹ ਹੀ ਕਮਾਈ ਕਰੀ ਜਾਂਦੇ ਜੋ ਜਿਹੜੇ ਅਸੀਂ ਦਾ ਪਾਤ ਆਬ ਕਰਦੇ ਜਿਨ ਕੇ ਚਿੱਤ ਕਠੋਰ ਹੈ ਤੇ ਬਹਿਨਾ ਸਤਗੁਰ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿੱਤੁ ਦਾ ਜਿਹਦਾ ਚਿੱਤ ਕਠੋਰ ਨਾ ਸਭ ਅਦਗੁਰ ਪਾਸ ਪਾਸ ਦੀ ਬਹਿੰਦੇ ਉਹਨਾਂ ਨੇ ਉੱਤੇ ਅਸਲ ਦੀ ਉੱਤੇ ਸਤਗੁਰ ਦੀ ਗੱਲ ਦਾ ਤਾਂ ਦੀ ਬਹਿੰਦੇ ਕਠੋਰ ਤੇ ਤਾਲੇ ਦੀ ਸੱਚ ਦੀ ਲੋੜ ਨਹੀਂ ਹੈ ਕੂੜਿਆਰਾ ਨੂੰ ਕੂੜ ਚਾਹੀਦਾ ਓਏ ਵੱਲ ਛਲ ਕਰ ਛੱਤ ਫਿਰ ਜਾਏ ਬਹੇ ਕੂੜਿਆਰਾ ਪਾਸ ਉਹ ਬੜੇ ਔਖੇ ਹੋ ਵਚਾਲ ਕਰਕੇ ਉਹ ਟਾਈਮ ਪਾਸ ਕਰਦੇ ਨੇ ਉਹਨਾਂ ਚਰ ਓਕੇ ਓਕੇ ਬਹਿਦੇ ਨੇ ਸੁਣਦੇ ਨੇ ਉੱਤੋਂ ਉੱਠ ਕੇ ਫੇਰ ਕੂੜਿਆ ਦੇ ਪਾਸ ਆ ਕੇ ਬਹਿ ਜਾਂਦੇ ਨੇ ਸੁਣਨ ਵਿੱਚ ਸੱਚੇ ਕੂੜਨਾ ਗੱਡਈ ਮਨ ਵੇਖੋ ਕੋ ਨਿਰਜਾਸ ਬਿਦ ਸੱਚੇ ਕੂੜਨਾ ਕੂੜ ਕਿਵੇਂ ਵੇਲੇ ਸੱਟ ਵਿੱਚ ਕੂੜਾ ਕਰਦੇ ਸੁਭਾਅ ਹੈ ਠੀਕ ਹੈ ਜੀ ਸਾਚਾ ਰਕੂੜ ਤੇ 1 ਤੱਕ ਕਿੰਨੇ ਹੋ ਗਏ ਹੂੰ ਪੁੱਛਦੇ ਮੈਂ ਫਿਟਾਵੇ ਕੂੜ ਅੱਛਾ ਕੋਈ ਇਲਜਾਸ ਕੋਈ ਵਿਚਾਰ ਕਰਦਾ ਦੇਖੋ ਕੋਈ ਉਹ ਕੂੜ ਲਾਂ ਗਏ ਤੇ ਸੱਚ ਗਿਆ ਮੇਲੋ ਵਿੱਚ ਫਿੱਟੇ ਨਹੀਂ ਆ ਰਿਹਾ ਉਹਦੇ ਕੀ ਦੱਸਣ ਕੀ ਸਨੋੜ ਕੀ ਸਨ ਕਹਾਂ ਆ ਪਤਾ ਸੁਣਾ ਆ ਦੇ ਸਕਦੇ ਤਾਂ ਇਹਨਾਂ ਹੋਰ ਸੁਣਾਉਂਦੇ ਤੇ ਉੱਤੇ ਕੁਝ ਹੋਰ ਬਿਲ ਗਿਆ ਪਤਾ ਨੇ ਜੀ ਐਵੇਂ ਅੱਡ ਵੱਡੂ ਬਾਤ ਕਰਦੇ ਗੁਰੂ ਉੱਤੇ ਮੇਰੇ ਤਾਂ ਹੋਸਾ ਵੀ ਚੜੀ ਆ ਪਿਆਰ ਕੋੜ ਯਾਰੀ ਜਾਏ ਰਲੇ ਤੇ ਪਿਆਰ ਸਿੱਖ ਬੈਠੇ ਸਤਗੁਰੂ ਪਾਸ ਗੁੜਿਆਰ ਕੋੜੀ ਜਾਏ ਰਲ ਜਾਂਦੇ ਨੇ ਉੱਥੇ ਤਾਂ ਕੋਈ ਗੱਲ ਨਹੀਂ ਦੋ ਸਤਿਆਰ ਸਿੱਖ ਬੈਠੇ ਸਤਗੁਰੂ ਪਾਸ ਸਤਿਆਰ ਸਤਗੁਰ ਦੇਲੇ ਉੱਤੇ ਨੀਵਾਂ ਸਤਗੁਰ ਦਾ ਕੋਈ ਤਾਂ ਨਹੀਂ ਹਲਦੋਲੇ ਲੰਗੂ ਛੱਡ ਕੇ ਜਾਂਦਾ ਨਹੀਂ ਤੇ ਇਕੱਠੇ ਰਹਿ ਨਹੀਂ ਸਕਦੇ ਸਾਚਿਆਰੇ ਹਨ ਕੂੜਿਆਰੇ ਤੇ ਹੋ ਜਾਣ ਔਖਾ ਹੋ ਜਾਂਦਾ ਉਹ ਨੂੰ ਔਖਾ ਹੋ ਜਾਂਦਾ ਸਤਿਆਰੇ ਨੂੰ ਦੇਖੋ ਤਾਂ ਜਦੋਂ ਆਪਾਂ ਪੜਦੇ ਹਾਂ ਕੂੜਿਆਰ ਕੂੜਿਆਰੀ ਜਾਇਰਲੇ ਸਤਿਆਰ ਸਿੱਖ ਬੈਠੇ ਸਤਗੁਰ ਪਾਸ ਤੇ ਇਹ ਬੈਠਣ ਤੋਂ ਕੀ ਭਾਵ ਬਣਦਾ ਜੀ ਦੇ ਸਿੱਖ ਜਿਵੇਂ ਸੰਗਤ ਕਰਕੇ ਬੈਠੇ ਆ ਬਾਹਰੋਂ ਜੁੜ ਕੇ ਬੈਠੇ ਜੁੜ ਕੇ ਬੈਠੇ ਸਿੱਖ ਤਾਂ ਛੱਡ ਗੁਰੂ ਦੀ ਸੇਵਾ ਜੇ ਰਹਿਣ ਨਾ ਜਿਵੇਂ ਕੋਰਵਾਲੇ ਕੋਰਵਾੜੀ ਹੈ ਨਾ ਸੇਵਾਦਾਰ ਦੂਸਰਾਂ ਤਾਂ ਕੋਰਵਾਲੇ ਜਿਹੜੇ ਸੰਦੇਖ ਵਰਤਾਈ ਤੋਂ ਬਾਅਦ ਵੀ ਜੇ ਦੂਰ ਨੇ ਉਹ ਤਾਂ ਸਮਝਾਉਂਦੇ ਦੇਖ ਭਗਤੀ ਤੇ ਭੱਜੇ ਕਰਨ ਵੇ ਦੇ ਗਵਰਤੀ ਕਰ ਲਉ ਜਾਈਏ ਜੇ ਜਾਣਦੇ ਵੀ ਇਹਨਾਂ ਤਾਂ ਛੁੱਟੀ ਲੈ ਕੇ ਜਾਂਦੇ ਨੇ ਬਸ ਜੇ ਬਾਰੋ ਵੀ ਆਏ ਹੋਏ ਨੇ ਜਾਣਾ ਤਾਂ ਬਕਾਇਦਾ ਛੁੱਟੀ ਲੈ ਕੇ ਜਾਂਦੇ ਉਹ ਰਾਜਾ ਆਉਂ ਆਏ ਨੇ ਕੂੜਿਆਰ ਆਪਣੀ ਗਾਧੀ ਲੈ ਆਇਆ ਆਪਣੀ ਬੱਧੀ ਦੋ ਚਲੇ ਜਾਂਦੇ